ਸ਼ਲੋਕ ਮਹੱਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਜੇਨ ਵਡਿਆਈ ਤੇਰੇ ਲੋਭ ਕੀ ਜੀਲ ਦੇ ਕੋਲ ਤੇਰੇ ਲੋਭ ਹੈ ਤੇਰੇ ਜਸ ਦੀ ਵਡਿਆਈ ਹੈ ਜਿਹੜਾ ਤੇਰਾ ਜਸ ਕਰਨ ਦੇ ਸੁਭਰਤ ਦੇ ਤੇਰੇ ਤੇਨ ਬਹੀ ਹੋਰ ਆਪਣੇ ਬੰਦ ਦੇ ਵਿੱਚ ਸੱਚ ਦਾ ਅਰੰਭ ਕਿਲੇ ਉਹ ਤੇਰੇ ਰੰਗ ਚ ਰੰਗੇ ਹੋਏ ਨੇ ਉਧਰੋਂ ਉਧਰੋਂ ਸੱਚ ਦਾ ਰੰਗ ਉਹ ਬੁੱਧੀ ਸੱਚ ਦੇ ਅਰੰਭ ਚ ਰੰਗੇ ਪਏ ਨੇ ਤੇ ਜੇ ਪਏ ਨੇ ਸੱਚ ਵਿੱਚ ਹੋ ਤਾਂ ਇੱਕ ਉਬਰ ਤੇ ਹੈ ਦੂਜਾ ਕਹਿੰਦਾ ਇੱਕੋ ਹੀ ਉਬਰਤਾ ਦੂਜਾ ਕੋਈ ਉਬਰ ਨਹੀਂ ਇਹ ਬਾਹਰ ਦੇ ਬਣਾਏ ਹੋਏ 36 ਉਬਰ ਤੇ ਬਾਹਰ ਜਿਹੜੇ ਵਾਇਆ ਦੇ ਬਣੇ ਹੋਏ ਨੇ ਵਾਇਆ ਦਾ ਸਰੀਰ ਹੈ ਖੰਦਾ ਆਤਮਾ ਦੇ ਖੰਨੇ ਵਾਲਾ ਹੀ ਉਬਰਤਾ ਹੈ ਉਹ ਹੈ ਨੋ ਉਬਰ ਉਹ ਖਾਦਾ ਵੀ ਜਾ ਸਕਦਾ ਹੈ ਪੀਤਾ ਵੀ ਜਾ ਸਕਦਾ ਜਿੰਨ ਕੋ ਲੱਗੀ ਪਿਆਸ ਅਬਰਤ ਸਹੀ ਖਾਏ ਉਹ ਪਿਆਸ ਵੇਲੇ ਖਾਦਾ ਜਾਂਦਾ ਹੈ ਧੁੱਕ ਵੇਲੇ ਪੀਤਾ ਵੀ ਜਾਂਦਾ ਜਦੋਂ ਫੀੜੇ ਵਾਲੀ ਚੀਜ਼ ਆ ਲੋ ਸੌੜ ਵਾਲੀ ਚੀਜ਼ ਆਇਜਲੇ ਅਬਰਤ ਨੇ 36 ਦੇ ਜਦੋਂ ਪੌੜ ਨੂੰ ਅਸੀਂ ਅਬਰਤ ਕਹਤਾ ਸੀ ਇਹ ਗਲਤੀ ਕੀਤੀ ਸੀ ਕੀਤੀ ਨਹੀਂ ਸੀ ਗਲਤੀ ਗਲਤੀ ਜਾਣ ਬੁਝ ਕੇ ਕਰਵਾਈ ਸੀ ਸਾਥੇ ਕਿ ਇਹਨਾਂ ਦੀ ਪੌੜ ਨੂੰ ਅਬਰਤ ਕਹਿ ਕੇ ਖੋਡੀਆਂ ਖੋਟੀ ਕਰ ਦਈਏ 36 ਅਬਰਤ ਆਲਰੇਡੀ ਦੇ 30 ਬਸ ਉੱਪਰ ਹੋ ਤੌਰ ਬੜੀ ਦੀ ਸਰਦੇ ਕੇ ਹੁਣ ਉਹ ਦੰਦੇ ਰਿਸ਼ਵਤ ਉਹ ਖਬਰ ਤਾਂ ਦੰਦੇ ਆਸੀ ਰਿਸ਼ਵਤ ਦੇ ਕੇ بیا ਰਿਸ਼ਵਤ ਲੈ ਲੋ ਖਬਰ ਦੇ ਛੱਡ ਲੋ ਕਿਰਪਾ ਨਾਲ ਫਰੀ ਤੇ ਸ਼ਾਇਰੇ ਫਰੀ ਕੋ ਚੱਲਦਾ ਹੈ ਕਿ ਅਮਰਤ ਜੋ ਕਹਿਤਾ ਅਮਰਤ ਤਾਂ ਮਾਇਆ ਰੂਪ ਹੈ ਸੈਂਟੀਮੀਟਰ ਬਰਤੇ ਆਗੇ ਇੱਕ ਨੰਬਰ ਦੀ ਚੀਜ਼ ਨੂੰ ਸੈਂਟੀਮੀਟਰ ਬਰਤੇ ਕਰਤਾ ਬੜੀ ਸ਼ਰਾਰਤ ਨਾਲ ਨਾਨਕ ਕਬਲ ਏਕ ਦੂਜਾ ਬਸਰ ਦੂਜਾ ਬਰ ਤੇ ਜਦ ਕਹਿੰਦਾ ਹੈ ਹੀ ਨਹੀਂ ਕੋਈ ਦਾਨ ਕਹਿੰਦਾ ਇਹ ਹੈ ਉਹ ਦੇ ਗਾ ਜਿਹੜਾ ਮੂੰਹ ਨਾਲ ਖਾਣ ਵਾਲਾ ਅਬਰ ਤਾਂ ਉਹ ਵਿਖਿਆ ਹੀ ਹੈ ਫਿਰ ਉਸ ਆਪ ਨੇ ਵਿਖਿਆ ਹੋਈ ਉਹ ਹਾਂਜੀ ਨਾਨਕ ਅੰਮ੍ਰਿਤ ਮਨੇ ਮਾਹੇ ਆਈਏ ਗੁਰਪ੍ਰਸਾਦ ਤਿਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦ ਆਹਨੇ ਕਹਨ ਉਹ ਅਬਰ ਜਿਹੜਾ ਹੈ ਇੱਕੋ ਹੈ ਕਿੱਥੇ ਕਿੱਥੋਂ ਮਿਲਦਾ ਆਹਨ ਦਾ ਅਬਰ ਤਾਂ ਬੁਨਾਇ ਬੋਏ ਬੰਦੇ ਅੰਦਰ ਉਕਦਾ ਅਬਰ ਤਾਂ ਬਾਹਰ ਗਈ ਨਹੀਂ ਕਵੇ ਬਲਾਦੂ ਕਿ ਤੁਸੀਂ ਵਾਟੇ ਚ ਅਬਰ ਵਾਟੇ ਚ ਵਾਟੇ ਸੁਭਰਤ ਆਪਣੇ ਆਪਣੇ ਦੁਲਤੇ ਉੱਤੇ ਅੰਦਰ ਹੀ ਪੀੜ ਬਾਹਰ ਆ ਨਹੀਂ ਸਕਦਾ। ਨਾਨਕ ਅਭਰਤ ਬਨੇ ਨਾ ਹੈ ਪਾਈਆ ਗੁਰ ਪ੍ਰਸਾਦ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਨਾਲ ਗੁਰਬਾਣੀ ਦੇ ਗਿਆਨ ਨਾਲ ਕੀਤਾ ਜਾਂਦਾ ਪੀੜ ਦੀ ਸੋਝੀ ਆਉਂਦੀ ਹੈ ਪਹਿਣਾ ਦਸਰੋ ਲੱਭਣ ਜੁਗਤ ਹੈ। ਇਹੀ ਤਾਂ ਵਿਧੀ ਹੈ। ਵਿਧੀ पूर्वक ਪੀੜ ਪੀੜ ਦੀ ਵਿਧੀ ਸਿੱਖਣੀ ਪੈਦੀ ਹੈ ਗੁਰਬਾਣੀ ਤੋਂ। प्राप्ति अद्रु किवें होडी है सतगुरु ते लो पाया जाए लोभ पर सन्गुरु ਤੋਂ ਪਾਇਆ ਪੀਤਾ ਕੀਨੇ ਰੰਦਸਿਉ ਰਾਮਗਨ ਆ ਰੰਗ ਜਦੇ ਚੜ ਜਾਂਦਾ ਪੀਧੀ ਸਾਰੇ ਲੋਭ ਦਾ ਸੱਚ ਦਾ ਰਗ ਚੜ ਜਾਂਦਾ ਕੱਲਾ ਗਿਆਨ ਨਹੀਂ ਹੈ ਅਰੰਧ ਵੀ ਚੜਦਾ ਜੀਵਨ ਵੀ ਬਦਲਦਾ ਲਿਖਿਆ ਆਦ ਓ ਜਮੜ ਤੋਂ ਪਹਿਲਾਂ ਹੀ ਲਖ ਲਿਆ ਸੀ ਵੀ ਪੀੜ ਐਤ ਕੀ ਤੈਨੂੰ ਮਿਲ ਵੀ ਜਾਊ ਉਹਨਾਂ ਨੇ ਵੀ ਕਹਿਤਾ ਸੀ ਕੋਈ ਨਹੀਂ ਮਿਲੂਗਾ ਵੀ ਤਕੜਾ ਹੋ ਕੇ ਰਹੀ ਪਰ ਉਹ ਕਹਿੰਦਾ ਸੀ ਵੀ ਐਤ ਗਿਆ ਮੈਨੂੰ ਕਿਰਪਾ ਰੱਖੇ ਮੇਰੇ ਤੇ ਉਹ ਕਹਿੰਦਾ ਕੋਈ ਨਹੀਂ ਮਿਲ ਜੂਗਾ ਤੈਨੂੰ ਤਕੜਾ ਰਹੀ ਪਰ ਦੁਨੀਆਂ ਦੇ ਵਿੱਚ ਝਵੇਲੇ ਜਿਹੜੇ ਨੇ ਅਖੜ ਤੋਂ ਤਕੜਾ ਹੋ ਕੇ ਰਹਿਣਾ ਮਿਲ ਜੂਗਾ ਜੀ ਮਹੱਲਾ ਦੂਜਾ ਕੀਤਾ ਕਿਆ ਸਲਾਹੀ ਹੈ ਕਰੇ ਸੋਏ ਸਲਾਹੀ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਹੀਂ ਕੀਤਾ ਕਿਆ ਸਲਾਹੀ ਹੈ ਜੋ ਕੀਤਾ ਹੈ ਉਹਦੀ ਸਬਸਲਾ ਕਰਦੇ ਜੋ ਪਰਮੇਸ਼ਰ ਨੇ ਪੈਦਾ ਕਰਾਇਆ ਹੈ ਸਬਸਵਾਲ ਨਹੀਂ ਕਰਦੀ ਹੁਕਮ ਹੈ ਸਾਨੂੰ ਜਿਹਦੇ ਸਰੀਰ ਕਰਕੇ ਗੁਰੂ ਪੈਦਾ ਹੋਏ ਨੇ ਭਗਤ ਪੈਦਾ ਹੋਏ ਨੇ ਜੋ ਚੰਦੇ ਫੁਕੇ ਕਰਦਾਰੇ ਸਾਨੂੰ ਪੈਦਾ ਕੀਤੇ ਹੋਏ ਨੇ ਉਹਨਾਂ ਦੀ ਸਲਾਹ ਕਰਨੀ ਗੁਰਮਤ ਤੋਂ ਉਲਟ ਹੈ ਐ ਭੰਗ ਆਪਾਂ ਦੀ ਯਾਦ ਲਈ ਦੰਦੀ ਗੁਰਬਾਨੀ ਦੀ ਕੀਤਾ ਗਿਆ ਸਾਲ ਆਈ ਏ ਕਰੇ ਸੋਈ ਸਲਾਹ ਜਿਹੜਾ ਕਰਨ ਵਾਲਾ ਬਣਾਉਣ ਵਾਲੇ ਦੀ ਸਿਫਤਾਂ ਕਰਦੇ ਕਰਦੀ ਤੇ ਨਹੀਂ ਤਾਂ ਚੁੱਪ ਰਹਿ ਕਿਉਂਕਿ ਉਸ ਤੋਂ ਤਾਂ ਡੁੱਦਾ ਦੂਭ ਉਬਰਜਤ ਉਸ ਤੋਂ ਦੋ ਹੀ ਸੰਦੂ ਬਲੋਦੇ ਨਾਨਕ ਐ ਕਿ ਬਾਹਰ ਅੁੱਜਾ ਦਾਤਾ ਤੌ ਤੌ ਤੈ ਕੋਈ ਉਹ ਦੂਜਾ ਤਾਂ ਇਹਦੀ ਕੋਈ ਬਗਦੇ ਕੀ ਤੋਂ ਹੋਇ ਤੁਸੀਂ ਕਿਤੇ ਉਹ ਅਰਦਾਸ ਕਰ ਦੋ ਖੜੇ ਹੋ ਕੇ ਅੰਦਰ ਚਾਕੇ ਦੇਖਣ ਜਿਹੜੇ ਅਰਦਾਸ ਕਰਦੇ ਨੇ ਜਿਹੜੇ ਅਰਦਾਸਾਂ ਕਰਦੀ ਡਿਊਟੀ ਲਾਈ ਹੈ ਜਿਹਨਾਂ ਦੀ ਗੁਰਦੁਆਰਿਆਂ ਦੇ ਵਿੱਚ ਟਕਤਾਂ ਦੇ ਉੱਤੇ ਵੀ ਅੰਦਰ ਚਾਗ ਲੈਣ ਆਪਣੇ ਕੀ ਕਰਦੇ ਨੇ ਤੁਸੀਂ ਗੁਰਬੰਦੀ ਤੋਂ ਉਲਟ ਕਰਦੇ ਹੋ ਕਿੱਥੇ ਭਰੋਗੇ ਤੁਸੀਂ ਲੱਤਾਂ ਵੀ ਤਾਹੀ ਕੱਬਦੀਆਂ ਹੁੰਦੀਆਂ ਅਰਦਾਸ ਕਰਦਿਆਂ ਦੀਆਂ ਪੁੱਲ ਚੋਕ ਵੀ ਤਾਹੀ ਕਹਿੰਦੇ ਜਾਣਦੇ ਸਭ ਕੁਝ ਨੇ ਸਮਾਗਿਆ ਹੁਣ ਚੱਲਣਾ ਪੈ ਜੂਗਾ ਹੁਣ ਨਹੀਂ ਕਿਸੇ ਨੇ ਤੁਹਾਡੀ ਲੈਅ ਅੱਜ ਕਰਦੀ ਤੁਹਾਨੂੰ ਕੋਈ ਦਾਤਾ ਕੌਣ ਹੈ ਹੁਣ ਤੂੰ ਤਾਂ ਵੈਲਿਊ ਨਹੀਂ ਰਹੀ ਤੁਹਾਡੀ ਕੋਈ ਉਹ ਹੀ ਪਹਿਲਾਂ ਪੁਜਾਰੀ ਸੀ ਉਹੋ ਜਿਹਾ ਦਾਤਾ ਨਹੀਂ ਦੂਜਾ ਕੋਈ ਦਾਤਾ ਨਹੀਂ ਹੈ ਸਭ ਦੁਨੀਆ ਜਾਣਦੀ ਹੈ ਸਭ ਲੋਕ ਜਾਣਦੇ ਨੇ ਇੱਕ ਦਮ ਬਗਾਵਤ ਹੋਣੀ ਹੈ ਹੁਣ ਤਖੜੇ ਹੋ ਜਾਓ ਹਾਂਜੀ ਕਰਤਾ ਸੋਸਾ ਲਾਹੀਏ ਜਿਨ ਕੀਤਾ ਆਕਾਰ ਦਾਤਾ ਸੋ ਸਲਾਹੀਏ ਜੇ ਸਭ ਦੇ ਆਧਾਰ ਕਰਤਾ ਸੋ ਸਲਾਹੀਏ ਕਰਤਾ ਉਹ ਹੈ ਉਹ ਕਰਤਾ ਦੀ ਹੈ ਜਿਦ ਕੀਤਾ ਆਕਾਰ ਜਿਹਨੇ ਸਭ ਕੁਝ ਬਣਾਇਆ ਚੰਦ ਸੂਰਜ ਬਣਾਏ ਨੇ ਕਿਤੇ ਹੋਰ ਦੀਵ ਕਰਨ ਲੱਗ ਜੋਂ ਚੰਦ ਸੂਰਜ ਬਣਾਏ ਨੇ ਗੁਰੂ ਰਾਮਦਾਸ ਨੇ ਚੰਦ ਸੂਰਜ ਬਣਾਏ ਨੇ ਕਿਹੜੇ ਲਾ ਪੈਗੇ ਤੁਸੀਂ ਸਿੱਖੀ ਦਾ ਕਰਤਾ ਨਾ ਜੇ ਜੇ ਉੱਪਰ ਹੈ ਜਿਹੜੇ ਜਾਣਦੇ ਸੀ ਇਹਦਾ ਮਤਲਬ ਇਹ ਥੋੜੀਆ ਵੀ ਤੁਸੀਂ ਨਾਸੇ ਕਰ ਦੋ ਉਡੀ ਸਾਨੂੰ ਗਾਣਾ ਨਾਸ ਕਰ ਦੇਣ ਤੁਸੀਂ ਕੋਈ ਬੱਤੇ ਆ ਕੇ ਫੈਸਲੇ ਰੱਖੀ ਜਾਉ ਚੀਜ਼ ਆਪੇ ਚੁੱਪ ਕਰ ਜਾਓਗੇ ਦਾਤਾ 100 ਸਾਲ ਆਹੀਏ ਕੇ ਸਭ ਸੇ ਕਰੇ ਆਧਾਰ ਉਹ ਦਾਤਾ ਹੈ ਜਿਹੜਾ ਸਾਰਿਆਂ ਨੂੰ ਆਧਾਰ ਦਿੰਦਾ ਹੈ ਆਸਰੇ ਸਾਰੀ ਸ੍ਰਿਸ਼ਟੀ ਹੈ ਸਾਰੀ ਸ੍ਰਿਸ਼ਟੀ ਦੇ ਜੀਵ ਇਹੇ ਗੱਦ ਸੂਰਜ ਸਾਰਾ ਆਕਾਰ ਬਣਾਇਆ ਆਇਆ ਦਾ ਔਰ ਸਾਰੇ ਨੂੰ ਅਧਾਰ ਦੇ ਰਿਹਾ ਹੈ ਸਰਵਾਸ ਦੇ ਰਿਹਾ ਹੈ ਸਭ ਇੱਕ ਦਾਤਾ ਸਭ ਗੁਗ ਤੇ ਜੀਵ ਦਾ ਸਾਰੇ ਗੁਗ ਤੇ ਰਹੇ ਉਹਦੇ ਦਾਤਾ ਇੱਕ ਇਹ ਤਾਂ ਕਹਿੰਦੀ ਗੁਰਬਾਣੀ ਤੁਸੀਂ ਪਤਾ ਨਹੀਂ ਕਿੰது ਕਿੰது ਦਾਤਾ ਬਣ ਲਈ ਬੈਠੇ ਹਾਂ ਜੀ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰਸਾ ਅੰਤ ਨਾ ਪਾਰਾ ਵਾਲ ਨਾਨਕ ਆਪ ਸਦੀਵ ਐ ਨਾ ਕਿੰਨਾ ਆਪ ਦਾ ਸਦਾਈ ਨਾ ਸਦੀਪ ਕੌਣ ਨੇ ਪਰਮੇਸ਼ਰ ਸਦੀਵ ਐ ਕੋਈ ਸਦੀਵ ਨਹੀਂ ਹੈ ਗੁਰਬਾਣੀ ਕਹਿੰਦੀ ਐ ਤੇ ਵੀ ਮੈਂ ਸਦੀਵ ਜੀ ਸਦੀਵ ਉਹ ਐ ਤੁਸੀਂ ਜਿਹੜਾ ਕਹਿੰਦਾ ਉਹ ਸਦੀਵ ਐ ਉਹਨੂੰ ਸਦੀਵ ਬਣਾਤਾ ਇਹ ਕਿੱਥੇ ਲਿਖਿਆ ਸੀ ਕਿਹਨੂੰ ਕਿੱਥੇ ਬਣਾਇਆ ਹੈ ਨਾਨਕ ਆਪ ਸਦੀਵ ਐ ਉਹਨੂੰ ਤਾਂ ਕਹਿ ਰਹੇ ਐ ਸਦੀਵਾਂ ਪੂਰਾ ਜਿਸ ਪੜ੍ਹਾਰ ਜਿਹਦਾ ਪੜ੍ਹਾਰ ਪੂਰਾ ਹੈ ਜਿਹਨੇ ਸਭ ਵਿੱਚ ਪਾਇਆ ਏਕਾ ਬਾਾਰ ਜਿਹਨੇ ਕੋਈ ਵਾਰ ਸਿਰਤੀ ਸਭ ਕੁਝ ਪਾਤਾ ਦੁਖਦਾਈ ਦੀ ਵੱਡਾ ਕਰ ਸਹ ਲਈ ਹੈ ਉਸੇ ਨੂੰ ਵੱਡਾ ਕਰਕੇ ਉਹਦੀ سلسلہ ਕਰਦੀ ਚਾਹੀਦੀ ਹੈ ਉਹ ਤੈਨੂੰ ਪਾਰਾ ਜਿਹਦਾ ਨਾ ਤਵਣਾ ਕਹਦੇ ਨਾ ਉਹਦਾ ਪਹਿਲਾ ਬੰਨਾ ਕਿਸੇ ਨੂੰ ਦਿਖਿਆ ਨਾ ਉਹਦੀ ਸਾਰੀ ਸਮਝ ਆਈ ਹੈ ਨਾ ਉਹਦੀ ਬੁੱਧੀ ਦਾ ਕੋਈ ਪਾਰ ਪਾ ਸਕਿਆ ਹਾਂਜੀ ਇਹ ਪਰਮੇਸ਼ਰ ਵਾਸਤੇ ਕਹੀਆਂ ਜਾ ਰਹੀਆਂ ਜੀ ਸਾਰੀਆਂ ਗੱਲਾਂ ਹਾਂਜੀ ਹਾਂਜੀ ਪਰਮੇਸ਼ਰ ਵਾਸਤੇ ਕਹੀਆਂ ਹੈ ਗੱਲ ਅੱਛਾ ਪਰ ਜਦ ਆਪਾਂ ਪੜਦੇ ਸੇਵਕ ਕੇ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਉਹੀ ਆਇਗੜੂ ਉਹੀ ਠੀਕ ਹੈ ਜੀ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋਊ ਤੂ ਕਦ ਨਹੀਂ ਪਰ ਇੱਥੇ ਨਿਰੰਕਾਰ ਪ੍ਰਭ ਲਿਖਿਆ ਉਹਨਾਂ ਨੇ ਪ੍ਰਭੂ ਨਹੀਂ ਲਿਖਿਆ ਨਿਰੰਕਾਰ ਪ੍ਰਭ ਜਦ ਬਾਪ ਆਪਣੇ ਬਾਪ ਨੂੰ ਬਾਪ ਕਹੂ ਕੋਊ ਬਾਪ ਇਹੋ ਪ੍ਰਭੇ ਕਹੂ ਬਾਣੀ ਸਤਗੁਰ ਦੀ ਹੈ ਸਤਗੁਰ ਬੋਲਦਾ ਲੋ ਉਹ ਸਤਗੁਰ ਦਾ ਪ੍ਰਭ ਹੈ ਸਤਗੁਰ ਸਾਡਾ ਪ੍ਰਭ ਹੈ ਸੀਨੀਅਰ ਹੈ ਨਾ ਪ੍ਰਭ ਦਾ ਬਗਵਾਨ ਸੀਨੀਅਰ ਹੁੰਦਾ ਸੀ ਉਹ ਸੀਨੀਅਰ ਕਹਿੰਦੇ ਦਾ ਪ੍ਰਭ ਪਰਮੇਸ਼ਰ ਠੀਕ ਹੈ ਉਹੀ ਹੈ ਕਿ ਉਹ ਸਤਗੁਰ ਦਾ ਜਿਹੜਾ ਪ੍ਰਭ ਹੈ ਉਹ ਪਰਮੇਸ਼ਰ ਹੈ ਆਪਾਰ ਬ੍ਰਹਮ ਹੈ ਉਹਨਾਂ ਨੂੰ ਕਹੇ ਵੱਡਾ ਕਰ ਸਲਾਹੀ ਅੰਤ ਨਾ ਠੀਕ ਹੈ ਜੀ ਹਾਂ ਹਰਕਾ ਨਾਮ नाम ਹੈ है, ਸੁਖ सुख पाई, नाम निरंजन ਪਤਸਿਉ ਘਰ ਜਾਈ ਹਰਕਾ ਨਾਮ ਨਿਧਾਨ ਹੈ ਹਰਕਾ ਜਿਹੜਾ ਗਿਆਨ ਹੈ ਕੀ ਤਖਜਾਨ ਹੈ ਹਰਕਾ ਗਿਆਨ ਇਹ ਖਜ਼ਾਨਾ ਹੁੰਦਾ ਨਾਮ ਉਹ ਥੋੜੀ ਜਿਹਾ ਅਨੁਦ ਰਟਣ ਵਾਲਾ ਲੋ ਬਾਰ ਬਾਰ ਇਹਦਾ ਇਹ ਨਾਨ ਬਣਦਾ ਗਿਆਨ ਦਾ ਨਿਧਾਨ ਹੁੰਦਾ ਹਰਕਾ ਸਭ ਤੋਂ ਉੱਤਮ ਹਰ ਕਥਾ ਕਥਾ ਵਿੱਚ ਗਿਆਨ ਤੇ ਹੈ ਸੁਖ ਪਾਈ ਜੇ ਇਹਨੂੰ ਵਿਚਾਰੀਏ ਤੇ ਵੀ ਹੈ ਤੇ ਮਤਲਬ ਵਿਚਾਰੀਏ ਜਿਹੜਾ ਸੁਖ ਮਿਲਦਾ ਹੈ ਗਿਆਨ ਦੇ ਅਧਾਰ ਚੱਲੀਏ ਗਿਆਨ ਦੇ ਜੀਵਨ ਜੀਏ ਸੁਖ ਮਿਲੂਗਾ ਨਾਮ ਨਰਿੰਦਰਨ ਉਚਰਲ ਜੇ ਤੋੜ ਨੂੰ ਲੱਜਣਾ ਵਜੜਾ ਜਿਹੜਾ ਕਾਦੀ ਦਾ ਗਿਆਨ ਉਚਰੋ ਜੇ ਉਚਾਰਨ ਕਰਾਂ ਪਤ ਘਰ ਜਾਈ ਬਸ ਇਹ ਜਿਤਨਾ ਧਰ ਚੱਲਿਆ ਜਾਊਗਾ ਕੋਈ ਰੋਗ ਨਹੀਂ ਫਿਰ ਇੱਜ਼ਤ ਮਿਲਦੀ ਹੈ ਕਰ ਗਏ ਰੂ ਚਾਣਾ ਸਾਰਿਆਂ ਦਾ ਹੀ ਹੈ ਪਰ ਵੇਚ ਤੋਂ ਹੁੰਦੇ ਨੇ ਕੋਈ ਕੁਝ ਨੂੰ ਇੱਜ਼ਤ ਮਿਲਦੀ ਹੈ ਪਰ ਕੇ ਸਾਰਿਆਂ ਦੇ ਖਤ ਹੋ ਜਾਂਦੇ ਨੇ ਚੱਪਰ ਕੇ ਬਾਟੇ ਜਾਂਦੇ ਨੇ ਫਿਰ ਪਤਾ ਲੱਗਦਾ ਇੱਜ਼ਤ ਕਿਹਨੂੰ ਮਿਲਦੀ ਹੈ ਵੇਚਤੀ ਕਿਹਨੂੰ ਮਿਲਦੀ ਹੈ ਗੁਰਮੁਖੀ ਬਾਣੀ ਨਾਮ ਹੈ ਨਾਮ ਰਿਦੈ ਮਤ ਪੰਖੇਰੂ ਵਸ ਹੋਏ ਸਤ ਤੇ ਆਈ ਆਇ ਤੇ ਵਹਿਰ ਵਾਲੇ ਉਹਦੀ ਕੱਲਗੇ ਗੁਰੂ ਗੁਕੀ ਬਾਣੀ ਦਾ ਨਾਮ ਹੈ। ਇਹ ਜਿਹੜੀ ਗੁਰੂ ਗੁਕੀ ਬਾਣੀ ਹੈ ਗੁਰਬਖਾਦੀ ਵਿਚਾਰੀ ਹੋਈ ਬਾਣੀ ਹੈ ਗੁਰਬਾਣੀ ਇਹ ਹੀ ਲੋਗ ਸਿੱਧਾ ਇਹ ਦਿੱਤਾ। ਕਾਲੜ ਵੈਗਰੂ ਵਾਲੇ ਕੀ ਕਰਦੇ ਸੀ? ਕੱਢ ਦੇਣੇ ਸੋ ਗੁਰੂ ਬਾਣੀ ਨਾਮ ਹੈ। ਉਹ ਗੁਰਬਾਣੀ ਦੇ ਹਰ ਲੋਕ ਸਿਵਾਇਆ ਹੋਇਆ ਹੈ ਗਿਆਨ। ਇਹੀ ਨਾਮ। ਇਸੇ ਨੂੰ ਕਿਹਾ ਸੀਗਾ ਬੁੱਤਰ ਗੁਰਬੰਦਰ ਗੁਰਬਾਣੀ ਹੀ ਵੈਗਰੂ ਹੈ। ਇਹਨੂੰ ਜਪਣਾ ਇਹ ਨੂੰ ਸਮਝਣ ਵਰਤ ਪਰ ਖੇਰੂ ਵਸੋਏ ਸਤਗੁਰ ਤੇ ਆਈ ਉਹ ਕਿਸੇ ਪੰਖੇਰੂ ਦੇ ਵਸਣਾ ਹੋ ਜੀ ਪੰਖੇਰੂ ਕਾਣ ਦਾ ਜਪਣ ਵਾਲਾ ਜਿਹਨੇ ਉਡਾਰੀ ਬਾਜ਼ ਜਣੀ ਹੈ ਅ ਇੱਕ ਮਿੰਟ ਬਾਬਾ ਜੀ ਮਤ ਸਿਆਰੀ ਨਾਲ ਲਿਖਿਆ ਇਹ ਤੈਨੂੰ ਵੀ ਆਪਣੀ ਮਤ ਕਿਸੇ ਪੰਖੇਰੂ ਦੇ ਵਸਣਾ ਕਰਦੀ ਉਹੀ ਗੱਲ ਹੋ ਸਭ ਜੀ ਬੱਤ ਔਰ ਪਖੇਰੂ ਪਖੇਰੂ ਵਾਂਗ ਪਖੇਰੂ ਆਪਣੀ ਬੱਤ ਨੂੰ ਗੁਰ ਮੱਤ ਦੇ ਅਧੀਨ ਕਰ ਦਵੇ ਗੁਰੂ ਤੇ ਆਈ ਸਤ ਤੇ ਆਈ ਆਪਣੀ ਨੂੰ ਉਹਦੇ ਅਧੀਨ ਕਰਕੇ ਬੱਤ ਪਖੇਰੂ ਪਖੇਰੂ ਦੀ ਜਿਹੜੀ ਮਤ ਹੈ ਪਖੇਰੂ ਹੱਟ ਪਖੇਰੂ ਹੈ ਪਖੇਰੂ ਆਪਣੀ ਮਾਨਾ ਮਾਨੂ ਪਖੇਰੂ ਕਹਿਆ ਨਾ ਠੀਕ ਹੈ ਜੀ ਹੱਟ ਪਖੇਰੂ ਵਾਸੋ ਤੂੰ ਬਸ ਹੋ ਜੀ ਸਤਿਗੁਰੂ ਤੇ ਉਹਦੇ ਧਿਆਨ ਰੱਖੀ ਆਪਣੀ ਮੱਤ ਨੂੰ ਆਰਾਪ ਉਹਦੇ ਬਸ ਹੋ ਜੀ ਆਪਣੀ ਮੱਤ ਨੂੰ ਢਕਾਨਾ ਬਣ ਨਹੀਂ ਉਹਦੇ ਨਾਲ ਵੈਸ ਨਾ ਕਰੀ ਕਿ ਤੂੰ ਪਰੰਤੂ ਨਾ ਕਰੀ ਜੇ ਸਗਲਤੇ ਠੀਕ ਹੈ ਸਤਿਗੁਰੂ ਧਿਆਈ ਹਾਂ ਉਹ ਕੀ ਕਹਿੰਦਾ ਉਹਦੇ ਵੱਲ ਧਿਆਨ ਰੱਖੀ ਉਹ ਤੋਂ ਸਿੱਖਿਆ ਲਈ ਕਿ ਪਰੰਤੂ ਨਾ ਕਰੀ ਅੱਛਾ ਜੀ ਇਹ ਸਤਿਗੁਰੂ ਕਿਉਂ ਆਇਆ ਜੀ ਫਿਰ ਇੱਥੇ ਮਤ ਪੰਖੇਰੂ ਬਸ ਸਤਿਗੁਰੂ ਧਿਆਈ ਆਊਗਾ शब्द ਅੰਦਰੋਂ ਪੈਦਾ ਹੋਊਗਾ ਉਸ ਵੇਲੇ ਫਿਰ ਜਦ ਬੰਦ फिर ਹੁੰਦਾ ਫਿਰ ਅੰਦਰੋਂ ਪੈਦਾ ਹੋਊਗਾ ਸ਼ਬਦ ਅੱਛਾ ਫਿਰ ਸਤਿਗੁਰੂ ਦੇ ਵਿੱਚ ਧਿਆਨ ਰੱਖੀ ਹੈ ਜੀ ਫਿਰ ਬਾਣੀ ਅੰਦਰੋਂ ਆਈ ਹੈ ਉਹ ਉੱਥੇ ਧਿਆਨ ਹੀ ਹੈ ਜੀ ਅੱਛਾ ਜੀ ਸੁਣੀ ਨਹੀਂ ਹੈ ਆ ਜਦੋਂ ਤੱਕ ਆਪ ਧਿਆਲ ਹੋਏ ਨਾ ਉਹਨੇ ਤੱਕ ਆਪੇ ਧਿਆਲ ਹੋ ਜਾਣਾ ਉਹਨੇ ਉਹ ਧਿਆਲ ਹੋਊਗਾ ਤੈਨੂੰ ਤੁਰਤੀ ਬਾਣੀ ਮਿਲੂਗੀ ਨਾਲ ਤੈਨੂੰ ਮਿਲੂਗਾ ਤਰੋਂ ਲਈ ਨਾ ਬਰਨ ਜਦ ਤੂੰ ਧਿਆਨ ਧਿਆਨ ਰੱਖੇ ਜੁੜਿਆ ਰਹੇ ਆਪਣੀ ਮੱਤ ਨੂੰ ਬਚ ਕਰਕੇ ਫੇਰ ਉਹ ਕਿਰਪਾ ਹੋ ਜਰੂਰ ਤੈਨੂੰ ਉਹ ਮਿਲੂਗਾ ਫੇਰ ਤੂੰ ਉਹਦੇ ਨਾਲ ਲੈ ਲਈ ਤੇ ਪੰਖੇਰੂ ਮਨ ਨੂੰ ਹੀ ਕਿਹਾ ਜਿਹੜਾ ਪੰਖੇਰੂ ਮਤਲਬ ਜਿਹੜਾ ਉੜਦਾ ਆਹ ਬਸ ਪੰਖੇਰੂ ਹੀ ਹੈ ਬਚਾਰਾ ਹੋਰ ਕੀ ਹੈ ਛੇ ਜਗਾਂ ਹੁੰਦਾ ਜੀ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਇੱਥੇ ਵੀ ਮਤ ਸਿਆਰੀ ਨਾਲ ਹੀ ਹੈ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੀਂ ਮੈਂ ਰੋਵੰਦੀ ਸਭ ਜਗ ਰੁੰਣਾ ਰੁੰੜੇ ਵਣੂ ਪੰਖੇਰੂ ਪੰਛੀ ਵਾਸਤੇ ਹਾਂਜੀ ਮਤ ਪੰਖੇਰੂ ਵਸੋਏ ਸਤ ਗੁਰੂ ਧਿਆਈ ਇਹਨਾਂ ਨੇ ਅਰਥ ਕੀਤੇ ਆਗੇ ਜੀ ਜਿਉਂ ਜਿਉਂ ਗੁਰੂ ਦੇ ਰਾਹੀ ਗੁਰਮੁਖ ਨਾਮ ਸਿਮਰਦਾ ਹੈ ਪੰਛੀ ਵਾਂਗੂ ਉਡਾਰੀ ਇਹ ਮਤ ਉਸ ਦੇ ਵਸ ਵਿੱਚ ਆ ਜਾਂਦੀ ਹੈ ਮਤ ਵਸ ਚ ਆ ਜਾਂਦੀ ਏ ਕਿ ਮਨ ਵਸ ਚ ਆ ਜਾਂਦਾ ਇਹਨਾਂ ਨੂੰ ਇਹ ਗੱਲ ਸਾਫ਼ ਨਹੀਂ ਹੈ ਜੀ ਤਾਂ ਵਸ ਚ ਆ ਜਾਂਦੀ ਏ ਹਾਂਜੀ ਮਨ ਦੀ ਹੋਏਗੀ ਬੁੱਧੀ ਮਾਤਾ ਮੰਦੇ ਕੋਲ ਪਹਿਲਾਂ ਬਸਤੀ ਹੈ ਸਾਡੀ ਮਾਤਾ ਸਾਡੇ ਕੋਲ ਹੀ ਹੈ ਉਹ ਬਸਤੀ ਕਿਹਦੀ ਗੱਲ ਦੀ ਹੈ ਗੁਰੂ ਦੀ ਗੱਲ ਦੀ ਹੈ ਕਿੰਨੀ ਨੂੰ ਪਤਾ ਹੀ ਕੱਖ ਦੀ ਹੈ ਇਹ ਤਾਂ ਇਧੇ ਉੜ ਜੇ ਹਨ ਕੁਝ ਵੀ ਨਹੀਂ ਪਤਾ ਇਹਨਾਂ ਨੂੰ ਹੈ ਲਫਜ਼ਾਂ ਦਾ ਇਤਿਹਾਸਕਾਰ ਹੋਏ ਨੇ ਇਹਨਾਂ ਨੂੰ ਪਤਾ ਕੁਝ ਵੀ ਗੱਲ ਕੀ ਹੈ ਠੀਕ ਹੈ ਜੀ ਫਰੀਦਕੋਟ ਵਾਲੇ ਟੀਕੇ ਵਾਲੇ ਲਿਖਦੇ ਨੇ ਜੀ ਮਤ ਬੁੱਧੀ ਉਪਲਬਧ ਮਨ ਰੂਪੀ ਪੰਖੇਰੂ ਪੰਛੀ ਵੱਤ ਹੋ ਜਾਂਦਾ ਹੈ ਤਾ ਤੇ ਸਤਿਗੁਰੂ ਕੇ ਉਪਦੇਸ਼ ਕਰ ਪਰਮੇਸ਼ਰ ਦਾ ਧਿਆਨ ਕਰੀਏ ਕੀ ਇਹ ਜੀ ਮਤ ਬੁੱਧੀ ਉਪਲਖਤ ਰੂਪੀ ਪੰਖੇ ਰੂ ਪੰਛੀ ਹੋ ਜਾਂਦਾ ਹੈ ਉਹ ਨਾਲ ਲਿਖਿਆ ਨਾ ਸਕੇ ਕੁਝ ਕੀ ਕਹਿ ਤੰਗ ਵਿਦਵਾਨ ਇਸ ਤਰੀਕੇ ਨਾਲ ਲਿਖਦਾ ਹੁੰਦਾ ਮੇਰੀ ਗੱਲ ਕੇ ਤੇ ਕੇ ਨੂੰ ਪਤਾ ਲੱਗੇ ਮੇਰੀ ਲਿਖਿਆ ਠੀਕ ਲਿਖਿਆ ਠੀਕ ਹੈ ਜੀ ਤਾਂ ਇਹ ਕਹਿੰਦੇ ਆ ਜਿਉਂ-ਜਿਉਂ ਗੁਰੂ ਦੀ ਰਾਹੀ ਗੁਰਮੁਖ ਨਾਮ ਸਿਮਰਦਾ ਹੈ ਪੰਛੀ ਵਾਂਗ ਉਡਾਰੂ ਇਹ ਮਤ ਉਸ ਦੇ ਵਸ ਵਿੱਚ ਆ ਜਾਂਦੀ ਹੈ ਕਿਹੜੀ ਮਤ ਆ ਇਸ ਦੇ ਬਾਰੇ ਇਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਪੰਖੇਰੂ ਹੈਗਾ ਇਹ ਹੀ ਹੈਗਾ ਜੇ ਇਹ ਆਪਣੀ ਮਤ ਵਸ ਚ ਰੱਖੇ ਇੱਕ ਮੱਤੀ ਵਸ ਚ ਰੱਖੇ ਦੱਸੋ ਜੀ ਪੰਖੇਰੂ ਚਾਹੁੰਦਾ ਮੇਰੇ ਵਸ ਚ ਕੁਝ ਹੋਵੇ ਅੱਛਾ ਜੀ ਇਹ ਤਾਂ ਸਾਫ਼ ਝਲਕ ਮਾਰ ਹਾਂਜੀ ਬਸ ਇਹੀ ਉਂਕਾਰ ਹੈ ਇਹਦਾ ਮਤਲਬ ਹੈ ਗੁਰਮਤਿ ਬਾਹਰ ਖੜੇ ਨੇ ਇਹ ਪ੍ਰੇਮ ਦੀ ਡੋਰੀ ਉਹ ਰੱਬ ਨੂੰ ਬਸਤ ਕਰਨਾ ਚਾਹੁੰਦੇ ਨੇ ਬਸ ਹੋਣਾ ਲਈ ਮਨ ਇਹਨਾਂ ਹੋਵੇ ਮਤ ਬਾਸ ਹੋਵੇ ਕਿਸੇ ਦੇ ਸਤਗੁਰ ਦੇ ਇਹਦੀ ਇਹਨਾਂ ਨੂੰ ਬਰਦਾਸ਼ਤ ਆ ਠੀਕ ਹੈ ਪੰਛੀਰੋ ਦੀ ਮਾਤ ਹੈ ਜਿਹੜੀ ਇਹ ਸਤਗੁਰ ਦੇ ਧਿਆਨ ਚ ਰਹੇ ਤਾਂ ਹੀ ਇਹ ਬਸ ਰਹਿ ਸਕਦੀ ਹੈ ਸਤਗੁਰੂ ਦਾ ਜੇ ਧਿਆਨ ਰੱਖਦੀ ਹੈ ਦੇ ਜੀ ਬਾਤ ਨੂੰ ਅਸੀਂ ਆਪਣੀ ਰੂਆਤ ਦਾ ਚ ਰੱਖਣ ਧਿਆਨ ਦੇਦਾ ਰਹੂਗਾ ਜੇ ਅਸੀਂ ਆਪਣੀ ਵਕਤ ਬਾਕੀ ਨਹੀਂ ਰੱਖੀ ਧਿਆਨ ਨਹੀਂ ਰਹ ਸਕਦਾ ਅਸਲ ਦੇ ਵਿੱਚ ਅਸੀਂ ਜੇ ਗ੍ਰੈਂਡ ਕਰਦੇ ਹੁੰਦੇ ਹਾਂ ਨਾ ਫਿਰ ਤਾਂ ਉਹਦੀ ਬਰ बात ਜੇ ਸੋਲ ਵੇਲੇ ਤੀ ਅਸੀਂ ਟਿੱਪੜੀ ਗੱਲ ਦੀ ਇੱਛਾ ਨਾਲ ਸੁਣ ਰਹੇ ਹਾਂ ਫਿਰ ਸਾਡੀ ਮਤ ਵਸਤ ਨਹੀਂ ਹੁੰਦੀ ਸੁਣ ਨਹੀਂ ਰਹੇ ਅਸੀਂ ਉਹਨੂੰ ਅਸੀਂ ਉਹਦਾ ਨੁਕਸ ਛੋੜ ਰਹੇ ਹਾਂ ਉਤੋਂ ਪ੍ਰਾਪਤੀ ਵੀ ਕੋਈ ਹੁੰਦੀ ਹੁੰਦੀ ਉਹ ਗੱਲ हटਾਈ ਹੋਈ ਆ ਆਪਣੀ ਜੇ ਪ੍ਰਾਪਤੀ ਕਰ ਲਈਏ ਸਤਿਗੁਰ ਤੋਂ ਆਪਣੀ ਬਤਰੂ ਬਸ ਬਸ ਜੇ ਉਮੀ ਜਿਆਦਾ ਬੁਲ ਕੇ ਕਰੇਗਾ ਬਸ ਜੇ ਜੇ ਇਹ ਤਰੀਕਾ ਅਪਣਾਵਾਂਗੇ ਤਾਂ ਸਤਿਗੁਰੂ ਵਿੱਚ ਧਿਆਨ ਜੁੜਿਆ ਰਹੇਗਾ ਹਾਂ ਫਿਰ ਕੋ ਧਿਆਨ ਤਾਂ ਤਾਲ ਜੁੜੂ ਜੇ ਤੱਕ ਪ੍ਰਾਪਤੀ ਦੀ ਇੱਛਾ ਕਿਉਂਕਿ ਮੇਰੇ ਕੋਲ ਜਿਆਦਾ ਸਾਧੂਰ ਨਾ ਫੇ ਲੈਣੋ ਥੀਏ ਤਾਂ ਸਤਿਗੁਰ ਨੂੰ ਫਰਾਉਂਡ ਦੀ ਗੱਲ ਕਰਦਾ ਉਹ ਇਹਦਾ ਨੁਕਸ ਖੜ ਕੇ ਮੈਂ ਇਹਨੂੰ ਕਿਵੇਂ ਹਰਾਉਣਾ ਵਿਦਵਾਨ ਵੀ ਵੀ ਕਰਦੇ ਤੇ ਸੁਰਤੇ ਕਦਰ ਦੇਖੇ ਸੁਰਤੇ ਨਹੀਂ ਆਣੇ ਹਾਂਜੀ ਸੁਰਤ ਦਾ ਹਲਵਾਨੜਾ ਸੁਰਨਾ ਦਾ ਗੁਰਮੁਖਰ ਬੜੇ ਜੜ ਸੁਰ ਨਹੀਂ ਹੁੰਦੇ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ